ਸ਼ਲੋਕ ਮਹੱਲਾ ਪਹਿਲਾ ਨਾਨਕ ਸਾਵਣੀ ਜੀਵਸੈ ਚੋ ਉਮਾਹਾ ਹੋਏ ਨਾਗਾ ਮਿਰਗਾ ਮੱਛੀਆਂ ਰੱਸੀਆਂ ਕਰ ਤਨ ਹੋਏ ਛਾਵੜੀ ਵੇਸੈ ਸਾਵੜੀ ਨਾ ਬਗੜਾ ਫੇਰ ਐ ਤੇ ਛਾਵੜੀ ਵਿਧਵ ਦਾਦਾ ਲੋਲੇ ਨੂੰ ਕਣ ਜੇ ਬੇਖਬਦੀ ਬਰਖ ਜਿਵੇਂ ਫੇਰ ਸਾਬੜੀ ਉਹਦਾ ਹੀ ਰੂਪ ਬਣ ਗਈ ਜਿਹੜੀ ਬਿਵੇਕ ਦਾ ਰੂਪ ਬੜੀ ਬਿਵੇਕ ਬੁੱਧੀ ਜੇ ਵਸੇ ਚੰਗ ਹੋਏ ਕਿਸ ਪ੍ਰਕਾਰ ਦੇ ਜੀਵਾਂ ਨੂੰ ਖੁਸ਼ੀ ਹੁੰਦੀ ਹੈ ਦਾਦਾ ਨੂੰ ਫੈਰਾ ਹੁੰਦਾ ਦਾਤੋਂ ਦੇ ਨਾਗਰਾਲਾ ਸਿੱਟਾ ਕੱਪੜੀ ਹੈ ਨਾਗ ਤਾਂ ਸਾਡੀ ਬੋਲੀ ਉਹਦੀ ਤੋਂ ਦਰੋਂ ਨੂੰ ਬਾਹਦੀ ਹੁੰਦੇ ਉਹ ਸ਼ਬੀਰ ਹੈ ਚਲੇ ਜਿਹੜੇ ਗੱਲ ਚ ਨਾਗ ਪਾਈ ਫਿਰਦੇ ਨੇ ਇਹ ਗਲੇ ਜੇ ਬੋਲਦੇ ਬੋਲਦੇ ਕੇ ਨਾਗ ਮੰਡੂ ਟਾਡਾ ਮੇਰੇ ਟਾਡਾ ਮੇਰੇ ਗਵਾਂਢ ਲਈ ਜਿਹੜੇ ਬਿਰਖਸ਼ਾਲਾ ਤੇ ਬਹਿ ਕੇ ਗાળા ਫਿਰਦੇ ਨੇ ਪੁੱਤਰਿਆ 1888 ਇਹ ਬਿਰਖਸ਼ਾਲਾ ਨੂੰ ਪੁੱਤਰ ਸਮਝ ਕੇ ਆਪਣੇ ਲੋਕੀ ਉਹਦੇ ਤੇ ਪ੍ਰੈਜ਼ੀਡੈਂਟ ਗੋੜਾ ਬੈਠ ਕੇ ਟਾਡਾ ਅਮਰੀਕਾ ਬੱਚੀਓ 25 ਨੋਨ ਜਲ ਕੀ ਮਛੜੀ ਖਜੂਰ 25 ਤਾਂ ਠੀਕ ਐ ਜੇ ਕੀ ਬੁੱਧੀ ਹੋ ਤਾਂ ਬੁੱਧੀ ਹੋ ਠੀਕ ਗਿਆਨ ਲੈਣ ਵਾਲੀ ਹੈ ਕੋਈ ਆਤਮਿਕ ਗਿਆਨ ਦੀ ਭੁੱਖੀ ਹੈ ਇਹ ਇੱਕ ਆਦਮੀ ਦੀ ਆਤਮਾ ਉਹ ਤਾਂ ਭੁੱਖੀ ਹੋਈ ਚਲ ਕੇ ਰਹਿਣ ਤੰਦ ਹੋਈ ਜਿਹੜੇ ਰਸੀਏ ਦੇ ਰਾਸ ਜਿਹੜੇ ਆਜਵੇਂ ਗੁਰਬਾਣੀ ਦਾ ਸਭ ਜਿਹੜਾ ਥੋੜਾ ਬਹੁਤਾ ਰਾਸ ਆਜਵੇਂ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿਆਰ ਨਾ ਨਾਗਾਂ ਨੂੰ ਕਿਵੇਂ ਖੁਸ਼ੀ ਹੁੰਦੀ ਹੈ ਫਿਰ 나ਗ ਤਾਂ ਅਸੀਂ ਦਗਾ ਦੀ ਉਹ ਗੱਲ ਕਰਦੇ ਆ ਸ਼ਬਦ ਦੀ ਗੱਲ ਕਰਦੇ ਆ ਸਮੋਦ ਦੀ ਗੱਲ ਕਰਦੇ ਆ ਦੀ ਗੱਲ ਕਰਦੇ ਉਹਨਾਂ ਦੇ ਬਤਨਵ ਦੀ ਗੱਲ ਕਰਦੇ ਆ ਉਹ ਰੋਧ ਦੀ ਗੱਲ ਨਹੀਂ ਕਰਦੇ ਉਹ ਸਿਰਫ ਉੜ ਗਿਆ ਹੋਵੇ ਸ਼ਬਦ ਵਿੱਚ ਕੋਈ ਸਿੱਧ ਕੋਸ਼ਟ ਵਿੱਚ ਉਹਨਾਂ ਨਾਲ ਤਾਂ ਹੀ ਚਰਚਾ ਲੱਭੀ ਕੀਤੀ ਤੁਸੀਂ ਉੜ ਗਿਆ ਹੋਵੇ ਸ਼ਬਦ ਤੁਹਾਡੇ ਠੀਕ ਨੇ ਤਾਂ ਠੀਕ ਨੇ ਪਰ ਉਹ ਸ਼ਬਦ ਸਾਛ ਜਿਕੇ ਹੁਣ ਉਹਨੇ ਵੀ ਹੋਇਆ ਪਰ ਉਹ ਸਰੀਰ ਦੇ ਸ਼ਬਦਾਂ ਨੂੰ ਸ਼ਬਦ ਸਬ지 ਬੈਠੇ ਉਹਦਾ ਭਲੇ ਖਾ ਨਿਕਲ ਜਾਂਦਾ ਹੈ ਜਿਕਰ ਜਾਂਦਾ ਖੁਸ਼ ਹੋ ਜਾਂਦਾ ਜੀ ਉਹਦਾ ਵੀ ਭਲੇ ਖਾ ਨਿਕਲ ਜਾਂਦੇ ਰਾਤ ਪਰ ਉਹ ਨਾਲ ਲੜਾ ਲਿਆ ਸੀ ਉਹਦੇ ਅੱਛਾ ਮਿਰਗਾ ਕੌਣ ਜੀ ਇਹ ਵੀ ਕੋਈ ਉਹ ਹੈਗਾ ਕੀ ਮਿਲੂਗਾ ਸਾਨੂੰ ਉਹ ਮਿਲੂਗਾ ਰਿਬੇ ਸਿੱਧੀਆਂ ਵਾਲੇ ਮਰਗਲ ਅੱਛਾ ਜੀ ਰਿਹਾ ਦਾ ਜਲ ਉਹ ਮੇਰੇ ਕੋ ਨਦੀ ਹੈ ਪਜਦੇ ਦੇ ਨਾਲ ਕੁਝ ਵੀ ਨਹੀਂ ਉੱਦਾਂ ਰਿਬੀਆਂ ਸਿੱਧੀਆਂ ਵਾਲੇ ਤ੍ਰਿਸ਼ਣੋ ਦਾ ਜਲ ਹੁੰਦਾ ਕੁਝ ਵੀ ਨਹੀਂ ਹੁੰਦਾ ਅੱਛਾ ਮੱਛੀਆਂ ਮੱਛੀਆਂ ਕੌਣ ਜੀ ਵਾਲੀ ਬਲੇ ਤਾਂ ਮੱਛੀ ਪਾਲੀ ਜਿਹੜਾ ਤਹਾਂ ਕਰਦੀ ਨਹੀਂ ਉਹ ਤਾਂ ਠੀਕ ਹੈ ਪਰ ਇਹ ਕਿਹੜਾ ਗਰੁੱਪ ਕਿਹੜਾ ਹੈ ਕਿਹਨਾਂ ਵੱਲੋਂ ਇਸ਼ਾਰਾ ਹੇ ਤਾਂ ਬੁੱਢੀਓ ਚਾਹੁੰਦੇ ਤਾਂ ਖੇਰ ਵਿਚੇ ਰਲੂ ਕੁਝ ਥੋੜੀ-ਬੋਦੀ ਜਾਣਦੇ ਵੀ ਨੇ ਗੱਲ ਪੂਰੀ ਦੀ ਜਾਣਦੇ ਅੱਛਾ ਚਾਹੁੰਦੇ ਤਾਂ ਹੈ ਗਿਆਨ ਪਰ ਅਜੇ ਪੂਰਾ ਨਹੀਂ ਅਧੂਰਾ ਹੈ ਚਾਹੁੰਦੇ ਦੂਰੇ ਆਪਣੀ ਪਕਾ ਕੇ ਚਾਹੁੰਦੇ ਤਾਂ ਹੈ ਪਰ ਕਿਹਨੇ ਅੱਛਾ ਜੀ ਤੇ ਰੱਸੀ ਜਿਹੜੇ ਰੱਸੀਏ ਹੈ ਇਹ ਉਹ ਨੇ ਜਿਹੜੇ ਵੇਦ ਪੜਦੇ ਸੀਗੇ ਸਮਝ ਆਉਂਦੀ ਨਹੀਂ ਸੀ ਜਿਵੇਂ ਆ ਦੇਖੋ ਆਪਣੇ ਪੱਕੀ ਜੀ ਵੇਰ ਸੀ ਥੋੜੇ ਆਇਆ ਥੋੜੀ ਜਿਹੀ ਸਭ ਚ ਜਦੇਰਾ ਸਾਗਿਆ ਨੂੰ ਠੀਕ ਹੈ ਜੀ ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧੰਨ ਹੋਏ ਇਹਨਾਂ ਦੇ ਘਰ ਵਿੱਚ ਨਾਮ ਤਾਂ ਆ ਜਾਂਦਾ ਹੈ ਜੀ ਤਾਂ ਤਾਂ ਇਹਨਾਂ ਦਾ ਥੋੜਾ ਬਹੁਤ ਗਿਆਨ ਜ਼ਰੂਰ ਆ ਜਾਂਦਾ ਪੂਰਾ ਨਹੀਂ ਉਹਦਾ ਥੋੜਾ ਬਹੁਤ ਇਹਨੂੰ ਲਵ ਜ਼ਰੂਰ ਹੋ ਜਾਂਦਾ ਠੀਕ ਹੈ ਜੀ ਇਹ ਚਾਰਾਂ ਦਾ ਮਿਲਣ ਦੀ ਗੱਲ ਹੈ ਅੱਗੇ ਮੈਨੂੰ ਲੱਗਦਾ ਚਾਰਾਂ ਦੇ ਵਿਛੋੜੇ ਦੀ ਗੱਲ ਆ ਰਹੀ ਹੈ ਮਹੱਲਾ ਪਹਿਲਾ नानक सावणी जीवसै चौह विछोड़ा होए गाय पुत्ता नृत्यना पंथी चाकर होए गौ माता गौ माता बन्ने रे बिछोड़ा पौड़ी पौड़ी मूर्ति पूजने रे ओ तो बिल्कुल विरोध है बिछोड़ा रहू सादा कि छोड़ा होए गाय ਆਪਰੇ ਜਿਹੜਾ ਨੇ ਚੇਲੇ ਨੂੰ ਬਿਲਕੁਲ ਉਹਨਾਂ ਦੀ ਬਣਾਤੀ ਤੇ ਤਾਂ ਆਖੀ ਬੁੱਧੀ ਨਾ ਹੋਏ ਤੇ ਉਹ ਉਹਦੀ ਬਣੜੀ ਉਹ ਕਰ ਬਣੜੀ ਜਨਤਲ ਨੂੰ ਤੇ ਕੋਈ ਨੇ ਸਭ ਜਿਖ ਬਣੜੀ ਨੇ ਜਨਤਲ ਆ ਕੋਈ ਫਰਤੀ ਹੈ ਕਿ ਜਰਾ ਤੋਂ ਤੇ ਉਲਟੇ ਉਹ ਕਦੇ ਜੀ ਬੰਦਾ ਛੜਦਾ ਜੀ ਜੇ ਮਸਲ ਬੋਲਦੇ ਉਹ ਕਦੇ ਨਾ ਫੀ ਦਾ ਛੜਦੇ ਜੋ ਬਰ ਕਹੀ ਜੋ ਚਾਰ ਕਿਹੜੇ ਕਿਹੜੇ ਹੋਗੇ ਜੀ ਫਿਰ ਤਾਂ ਫਰਤੀ ਹੋਗੇ ਹਾਂਜੀ ਇੱਕ ਨਿਰਤਨਾ ਹੋਗੇ ਇੱਕ ਪੂਤਾ ਹੋਗੇ ਕਿ ਗਾਈ ਹੋਗੇ ਗਾਈ ਯਾ ਪੂਤਾ ਅਲੱਗ ਅਲੱਗ ਨਹੀਂ ਹੈ ਹਨਾ ਗਾਈ ਯਾ ਅਲੱਗ ਨਹੀਂ ਗਾਈ ਪੂਤਾ ਅચ્છਾ ਗਾਈ ਪੂਤਾ ਹੋਗੇ ਕਿ ਨਿਰਤਨਾ ਹੋਗੇ ਕਿ ਪੰਥੀ ਹੋਗੇ ਕਿ ਚੱਕਰ ਹੋਗੇ ਗਾਈ ਪੂਤਾ ਪੜਨ ਦਾ ਹੋਗੇ ਜਿਹੜੇ ਜਿਵੇਂ ਮੁਸਲਮਾਨ ਹੋਗੇ ਹਨ ਜੀ ਵਾਲਾ ਪੰਥੀ ਜਿਹੜੇ ਕਰੋੜਾ ਰੋੜੇ ਹੋਏ ਨੇ ਆਹ ਚਲ ਰਹੀ ਦੀ ਆ ਜੰਤਰ ਦੇ ਉੱਤਰ ਤਰ ਤਰ ਕੋ ਸੇਵਾ ਕਰਦੇ ਵੀ ਦੁਦਿਓ ਦੀ ਕਈ ਆ ਸਰਾਗਨ ਮੰਨ ਦੇ ਵਿੱਚ ਬੈਠੇ ਨੇ ਬਣਾਏ ਬੜੀਆਂ ਨੇ ਸਰਾਗਨ ਕਈ ਲੰਗਰ ਚਾਉਂਦੇ ਨੇ ਕਈ ਕੁਛ ਕਰਦੇ ਨੇ ਕਈ ਕੁਛ ਕਰਦੇ ਨੇ ਗਿਆਨ ਤੋਂ ਵੀ ਹੁਣੇ ਹੈ ਸਖਣੇ ਹੈ ਸਖਣੇ ਦੀ ਗਿਆਨ ਤੋਂ ਅੱਛਾ ਚਾਰ ਹੋ ਗਏ ਨਾ ਗਾਈ ਪੂਤਾਂ ਨਿਰਤਨ ਪੰਥੀ ਚਾਕਰ ਚਾਕਰ ਦਾ ਉਹੀ ਸੇਵਾ ਕਰਨ ਵਾਲੇ ਜਿਵੇਂ ਕਾੜ ਸੇਵਾ ਵਾਲੇ ਹੋਏ ਅੱਛੇ ਜੀ ਬਿਗੁਰਦਵਾਰੇ ਬਣਾ ਦੇਣੇ ਹਾਂ ਬਸ ਬਸ ਠੀਕ ਹੈ ਹੋਏ ਤਾਂ ਭਾਵ ਕੀ ਹੈ ਹੋਏ ਤਾਂ ਭਾਵ ਇਹ ਅੱਡ ਹੋ ਗਏ ਇਹਨਾਂ ਦਾ ਕੋਈ ਅਸਰ ਨਹੀਂ ਹੋਇਆ ਇਹ ਇਹ ਵਿਛੜੇ ਰਹੇ ਦੇ ਗੁਰਮਤਨਾਂ ਦੀ ਜਿਹੜੇ ਗੁਰਮਤਨਾਂ ਨਹੀਂ ਆਉਣਗੇ ਇਹ ਤੂੰ ਦਾ ਸੱਚਾ ਨਸਿਆਰ ਤੂੰ ਸਭ ਦੇਖ ਰਿਹਾ ਥੰਦੇ ਕੀ ਹੋ ਰਿਹਾ ਔਰ ਸਾਚੀ ਦੇ ਵਰਤਾਇਆ ਤੈਂ ਵਰਤਾਇਆ ਸਾਚੀ ਦੇ ਥੰਦੇ ਨੂੰ ਭੇਜਿਆ ਤੈਨੂੰ ਭੇਜਿਆ ਪਰ ਸਾਚੀ ਦਾ ਵਰਤਾਰਾ ਤੇਰੇ ਕੋਲ ਨਹੀਂ ਆਇਆ ਮੈਂ ਤੇਰਾ ਦਿੱਤਾ ਹੋਇਆ ਦੱਸਿਆ ਕੋਈ ਆਇਨਾ ਨਾ ਗਾਇਆ ਵੀ ਲਾਂਤ ਸਾਨੂੰ ਭੰਡ ਦਿੱਤਾ ਕਹਿ ਤਾ ਪਰਮੇਸ਼ਰ ਤੇ ਗਲਤੀ ਗੱਲ ਤੂੰ ਸੱਚਾ ਸੱਚਿਆਰ ਤੈਨ ਸੱਚ ਵਰਤਾਇ ਠੀਕ ਹੈ ਬੈਠਾ ਤਾੜੀ ਲਾਏ ਕਮਲ ਛਪਾਇਆ ਅਕਾ ਤਾਲੀ ਆਪ ਤਾਲੀ ਲਈ ਬਖ ਸਾਨੂੰ ਦੇਖ ਰਹੇ ਧਿਆਨ ਨਾਲ ਆਪਣਾ ਉੱਪਰ ਛਾ ਕੇ ਰੱਖਿਆ ਹੋਇਆ ਬੋਲਦਾ ਜੀ ਆਪ ਨਹੀਂ ਬੋਲਦਾ ਬਰਮੇ ਵੱਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨੀ ਤੂੰ ਜਾਇਆ ਇਹ ਬਰਮੇ ਆਪਣਾ ਆਪ ਨੂੰ ਵੱਡਾ ਕਹਾ ਲਿਆ ਤੇ ਅੰਤ ਪਾਇਆ ਨਹੀਂ ਬਰਮੇ ਦਾ ਤੇ ਆਪ ਵੱਡਾ ਕਹਦੇ ਹੋ ਗਿਆ ਤੇਰਾ ਦਸਤਰੀ ਪਾਇਆ ਵੱਡਾ ਆਪ ਕਹਾਇਆ ਤੇ ਤੈਨੂੰ ਪਾਇਆ ਉਹ ਵੀ ਬੇਲ ਹੋ ਗਿਆ ਲੋਕਾਂ ਨੇ ਕਰਤਾ ਜੇ ਵੱਡਾ ਤਾਂ ਉਹ ਅਜਿਹਾ ਸੈਨ ਫਰੀ ਭਾਇਆ ਫਿਰ ਨਾ ਤੇ ਸਬਾਪ ਦਾ ਮਾਏ ਕਿਨ ਤੂੰ ਜਾਇਆ ਫਿਰ ਉਹ ਪਰਮੇਸ਼ਰ ਦੂਰੇ ਕਾ ਤੂੰ ਜਾਇਆ ਤੇਰੀ ਪਾਇਆ ਤਾਂ ਇਹ ਕਹਤਾ ਤੇਰਾ ਕੋ ਬਾਪ ਹੋਰੀ ਤੈਨੂੰ ਕਿਸੇ ਲਈ ਜਾਇਆ ਦੀ ਫਿਰ ਵੱਡਾ ਆਫਤਵੇਂ ਹੋ ਗਿਆ ਵੱਡਾ ਤਾਂ ਹੈ ਜਿਹੜਾ ਜੰਬੀ ਨਹੀਂ ਕਰੇ ਬ੍ਰਹਮਾ ਫਿਰ ਕੌਣ ਹੋਇਆ ਜੀ ਮੰਨੇ ਹੋਇਆ ਕਿ ਦੇਵਤਾ ਹੋਇਆ ਜਿਹੜੇ ਵੀ ਗਿਆਨ ਦੇਖਦੇ ਪ੍ਰਭ ਗਿਆਨ ਹੀ ਬੋਲੇ ਇਹਨਾਂ ਨੇ ਜਿਹੜੇ ਵੇਦ ਵਿੱਚ ਪਏ ਨੇ ਚਾਹੇ ਆਰਵਤ ਤੇ ਲੋ ਚਾਹੇ ਕਾਸੇ ਦੇ ਉਪਰਭੋਈ ਬੋਲੇ ਇਹਨਾਂ ਨੇ ਕਿਆ ਜੋਤਿਸ਼ ਦੇ ਵੀ ਗਿਆਨ ਉਹ ਵੀ ਪ੍ਰਭ ਹੀ ਬੋਲੇ ਸਾਰੀ ਇਹਨਾਂ ਨੇ ਜਿਹੜੇ ਫਾਸੂ ਗਿਆਨ ਦਿੱਤਾ ਖੋਜੀ ਖੋਜੀ ਵਚਨ ਹੈ ਕਿ ਬਹੁਵਚ ਅੱਛਾ ਬ੍ਰਹਮ ਵੱਡਾ ਕਹਾਏ ਨਾ ਪਾਇਆ ਜਿੰਨੇ ਬ੍ਰਹਮ ਉਹ ਵੱਡੇ ਤੱਕ ਆਏ ਪਰ ਉਹਨਾਂ ਨੂੰ ਮਾਇਆ ਦਾ ਹੀ ਨਿਅੰਤ ਮਿਲਿਆ ਕਿ ਪਰਮੇਸ਼ਰ ਦਾ ਅੰਤਰੀ ਮਿਲਿਆ ਪਰ ਬੇਖ਼ਲਦਾ ਤੇ ਮਾਇਆ ਦਾ ਬੜੀ ਪਤਾ ਲੱਗਿਆ ਅੱਛਾ ਜੀ ਤੇ ਫਿਰ ਇਹ ਕਹਿਤਾ ਨਾ ਤੇ ਇਸ ਬਾਪ ਦਾ ਮਾਇ ਕਿਨ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਣ ਸਬਾਇਆ ਨਾ ਤਿਸ ਭੁੱਖ ਪਿਆਸ ਰੱਜਾ ਤਾਇਆ ਵਰਲਡ ਹੋਦੇ ਨੇ ਸਾਰੇ ਪਰ ਉਹ ਦਾ ਵਰਲਡ ਹੈ ਕੋਈ ਵੀ ਇਹਦੇ ਵਿੱਚ ਉਦੀ ਰੂਪਰੇਖੀ ਦੀ ਹੈ ਸ਼ਰੀਰ ਦੀ ਰੂਪਰੇਖਾ ਮਿੱਟੀ ਦੀ ਬਾਣਸਵਾਇ ਤਵਾਇ ਬਾਣਾਂ ਦੇ ਵਿੱਚ ਉਹ ਤਾਂ ਆਪਣੀ ਰੂਪਰੇਖੀ ਹੈ ਚੌਥੀ ਰੂਪਰੇਖੇ ਕੋਈ ਨਹੀਂ ਬਣਦੀ ਹੈ ਸਾਲੇ ਬਣਦੇ ਵਿੱਚ ਉਹ ਆਪਣੀ ਰੂਪਰੇਖੀ ਜਰ ਹੁੰਦਾ ਠੀਕ ਹੈ ਜੀ ਚੌਥਾ ਬਣਦੇ ਰੂਪਰੇਖਾ ਨਜ਼ਰ ਆਉਂਦਾ ਕਿਤੇ ਬਾਣਾਂ ਦੇ ਵਿੱਚ ਨਹੀਂ ਨਾਂ ਤਿਸ ਭੁੱਖ ਪਿਆਸ ਰਜ ਜਾਤਾ ਉਹਨੂੰ ਭੁੱਖ ਪਿਆਸ ਵੀ ਨਹੀਂ ਹੈ ਸਰੀਰ ਨੂੰ ਭੁੱਖ ਪਿਆਸ ਲੱਗਦੀ ਹੈ ਜਾਂ ਰਾਜ ਜਾਂਦਾ ਰੀਲ ਦੀ ਭੁੱਖ ਪਿਆਸ ਆ ਉਹਦੀ ਭੁੱਖ ਪਿਆਸ ਉਹ ਹਮੇਸ਼ਾ ਰੱਜਿਆ ਹੋਇਆ ਨਾ ਉਹਨੂੰ ਭੁੱਖਾ ਨਾ ਪਿਆਸ ਹੋਵੇ ਜੇ ਮੰਨਤਾ ਹੈ ਤਾਂ ਵੇ ਇਹ ਤਾਂ ਭੁੱਖ ਪੈਸੇ ਤੇ ਉਹਨੂੰ ਭੁੱਖ ਪੈਸਾ ਸਰੀਰ ਨੂੰ ਭੁੱਖ ਪਿਆਸ ਹੈ ਜਿਹੜਾ ਤੋੜ ਨਹੀਂ ਸਕਦਾ ਮਾਰਦਾ ਵੜਾਰੀ ਉਹ ਬੁਰਕਾ ਡਾਗਦਾ ਹੀ ਮਾਰਦਾ ਭੁੱਖ ਪਿਆਸ ਹੋਵੇ ਵੜਾਰੀਆਂ ਦਾ ਤੇ ਮਾਰੇ ਮਨ ਦੀ ਗੱਲ ਹੋ ਰਹੀ ਹੈ ਜੀ ਤੇ ਨਹੀਂ ਮੰਦੀ ਗੱਲ ਐ ਜੇ ਦੀ ਭੁੱਖ ਪਾਣੀ ਦੀ ਪਿਆਸ ਹੋਵੇ ਐਡੂ ਹੋਵੇ ਐਟੇਕੇ ਨਾ ਬੈਠੇ ਵੀ ਪਾਣੀ ਪੀਤੇ ਤਾਂ ਸਰੂ ਉਹ ਭੁੱਖ ਪਿਆਸ ਤਾਂ ਛੇਰ ਨੂੰ ਹੁੰਦੀ ਐ ਤੇ ਕਾਇਦਰ ਨਾ ਮੇਰੀ ਐ ਤੇ ਇਹ ਤੁਝੋ ਕਰਕੇ ਸੁਝਾਇਆ ਹੋਇਆ ਹੋਰ ਤਾਂ ਕੁਝ ਨਹੀਂ ਪਰ ਇਹ ਉਹ ਗੱਲ ਐ ਵੀ ਦੇਖੋ ਜੀਵ ਹੈ ਸਾਰੇ ਜੀਵਾਂ ਦੇ ਵਿੱਚ ਸਾਰੇ ਵਰਡਾਂ ਦੇ ਪਰ ਇਹਦੀ ਰੂਪ ਰੂਪਰੇਖਾ ਤੱਕ ਤੇ ਠੀਕ ਹੈ ਜੀ ਤੇ ਬਾਹਰਲੇ ਅਗਿਆਨਤਾ ਵਾਸਤੇ ਭੁੱਖਾ ਜ਼ਰੂਰ ਹੈ ਪਰ ਫਿਰਦਾ ਭੱਜਿਆ ਆਪਣੀ ਭੁੱਖ ਪੂਰੀ ਕਰ ਲੂ ਇਹਨੂੰ ਇਹ ਨਹੀਂ ਪਤਾ ਮੇਰੀ ਭੁੱਖ ਹੈ ਕੀ ਅਸਲ ਗੁਰੂ ਦੱਸਦਾ ਜਦ ਚੱਕ ਕੇ ਹਾਦ ਫਿਰ ਇਹ ਤਾਂ ਪਹਿਲੀ ਏਨਰਜੀ ਉਹ ਬੇਸ਼ਕਰੀ ਹੈ ਜਿਹੜੀ ਪਹਿਲੀ ਏਨਰਜੀ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤਿਐ ਸੱਚ ਸਮਾਇਆ ਫਿਰ ਇਹ ਆਪਣੇ ਆਪ ਨੂੰ ਗੁਰ ਆਪਣੇ ਆਪ ਨੂੰ ਗੁਰ ਚ ਸਬੋਧ ਦਦਾ ਵੀਰ ਕਰ ਦਦਾ ਫਿਰ ਇਹ ਸ਼ਬਦ ਵਰਤੌਂਦਾ ਉਪਦੇਸ਼ ਵਰਤੌਂਦਾ ਦੁਨੀਆ ਨੂੰ ਸ਼ਬਦ ਵਰਤਦਾ ਸੱਚੇ ਹੀ ਪਤਿਐ ਸੱਚ ਸੁਗਉਂਦਾ ਕਾਜਣ ਵਾਲੇ ਕਿਸੇ ਨੂੰ ਕੋ ਸਾਊਗਾ ਸੱਚ ਦੇ ਬਿਨਾ ਭਰੋਸਾ ਨਹੀਂ ਹੋਣਾ ਕਿਸੇ ਨੂੰ ਪਤਾ ਨਹੀਂ ਆਣਾ ਕੋਈ ਵੀ ਸੱਚ ਦੇ ਸਮਾਉਗਾ ਚਰਿੱਤੀ ਤੇ ਭਰੋਸਾ ਹੋ ਸੈ ਸਕੂਂਗੂ ਜੇ ਮੇਰਾ ਬਚਾ ਹੈ ਸੱਚ ਦੇ ਬਿਨਾਂ ਨਹੀਂ ਪਤਾਇਆ ਜਾ ਸਕਦਾ ਸੰਸਾਰ ਨੂੰ ਥੋੜੀ ਦੇਰ ਵਾਸਤੇ ਅਦਭਚਦਾ ਪਤਾ ਕੇ ਮਗਲ ਲਾ ਕੇ ਰੱਖਿਆ ਜਾ ਸਕਦਾ ਹੈ ਸਭਾ ਆਊਗਾ ਫੇਰ ਮੈਂ ਖਤਬੋਲੀ ਗਾਰੀ ਉੱਤੇ ਤਰਬਸ ਪੈ ਰਿਹਾ ਹੈ ਠੀਕ ਹੈ ਜਦ ਤੱਕ ਸੱਚ 'ਚ ਨਹੀਂ ਮਨ ਸਮਾਉਂਦਾ ਜੱਥਾ ਹੀ ਫਤਿਹ ਆਇਆ ਨਹੀਂ ਜਾਊਗਾ ਹਾਂਜੀ ਸੱਚ ਤੋਂ ਬਿਨਾਂ ਫਤਿਹ ਆ ਜਾਣਾ ਸਮੋਂ ਕਾ ਬਾਅਦ 'ਚ ਫਤਿਹ ਆਊਗਾ ਸੱਚ ਤੋਂ ਠੀਕ ਹੈ ਜੀ ਇੱਥੇ ਦੂਸਰੀ ਪੜ੍ਹਾਈ ਸਮਾਪਤੀ ਹੈ ਜੀ